ਦੋਰਾ ਸ਼ਹਿਰ ਸਿਪਾਹਾ ਕੇ ਵਿਖੈ ਭਾਗਵਤੀ ਤ੍ਰੀਏਕ ਤਾਕੇ ਪਤਕੇ ਧਾਮ ਵੈ ਕੋਰੀ ਰਹੇ ਅਨੇਕ ਚਉਪਈ ਕੋਰੀ ਏਕ ਨਦੀ ਤਟ ਗਈ ਦਰਿਆਈ ਹੈ ਲਾਗਤ ਭਈ ਤਾਤੇ ਏਕ ਬਿਛੇਰੋ ਭਇਓ ਜਨ ਅਵਤਾਰ ਇੰਦਰ ਹੈ ਲਇਓ ਸ਼ੱਕਰਬਰਣ ਤਾ ਕੋ ਨਿਰਖ ਚੰਦਰਮਾ ਲਾਜੈ ਚਮਕ ਚਲਿਓ ਇਹ ਭਾਂਤ ਸੋਹਾਵੈ ਜਨ ਘਣ ਪ੍ਰਵਾਦਾਮਨੀ ਪਾਵੈ ਕਾ ਕੋ ਲੈ ਬੇਚੰਤਰੀ ਗਈ ਸ਼ਹਿਰ ਸ਼ਾਹ ਕੇ ਆਪਤ ਪਈ ਆਪਨ ਭੇਸ ਪੁਰਖ ਕੋ ਕੋਟ ਸੂਰਜਨ ਚੜੇ ਸਵਾਰੇ ਜਬੈ ਸ਼ਾਹ ਦੀਵਾਨ ਲਗਾਇਓ ਤਰੀਆ ਤੁਰ ਲੈ ਤਾਏ ਨਿਰਖ ਰੀਜ ਰਾਜਾ ਤਿਹ ਰਿਓ ਲੀਜੈ ਮੋਲ ਤਿਸੈ ਚਿਤ ਚਾਹਿਓ ਪ੍ਰਥਮ ਹੁਕਮ ਕਰ ਤੁਰਾ ਫੇਰਾਇਓ ਬੌਰ ਪ੍ਰਿਤ ਮੋਲ ਕਰਾਇਓ ਟਕਾ ਲੱਖ 10 ਕੀਮਤ ਪਰੀ ਮਿਲ ਗਿਲ ਮੋਲ ਦਲਾਲਨ ਕਰੀ ਅੜਿਲ ਤਾਬੇ ਬੁਲਾ ਤਿੰਨ ਬਚਨ ਉਚਾਰੇ ਭਿਆਸਿ ਹਮਰੋ ਬੈਨ ਸਾਹੋ ਤੂੰ ਸਰੂਣ ਧਰ ਪੰਜ ਹਜ਼ਾਰ ਮੋਹਰ ਮੋਹੇ ਹਾਂ ਦੇ ਜਾਈਐ ਉਹ ਲੈ ਕੇ ਤੁਰੈ ਬੰਧਾਈਐ ਹਜ਼ਾਰ ਮੰਗਾਏ ਕੈ ਚਰੇ ਤੁਰੰਗ ਤਿਹ ਦੀਨੀ ਕਰ ਪਗਰਾਏ ਕੈ ਕਹਿਓ ਮੋਹਰ ਪਹ ਚਾਹੇ ਬੌਰ ਮੈਂ ਆਏ ਹੋ ਉਹ ਤਾ ਪਾਛੈ ਘੁਰਸਾਰ ਹੈ ਔਰ ਬੰਧਾਏ ਹੋ ਯੋ ਕਹਿ ਤਿੰਸੋਂ ਬਚਨ ਤੋਂ ਆਇਓ ਤੁਰੈ ਤ੍ਰਿ ਪਠਾਇ ਬਖਰੀਆ ਪਹੁੰਚੇ ਕਰ ਕਹਿ ਕੋਬਹੀ ਕੋਸ ਡੇਢ ਸਹਿ ਲਗੇ ਹਟੇ ਹਾਰ ਕੈ ਹੋ ਹਾਥ ਨ ਆਈ ਬਾਲ ਰਹੇ ਸਿਰ ਮਾਰ ਕੈ ਮੋਹਰਾ ਗ੍ਰਹਿ ਪਹੁੰਚਾਇ ਸੋ ਆਈ ਬਾਲ ਤਾ ਬੈਠੋ ਚਾਰ ਬਨਾਏ ਸ਼ਾਹ ਜੂ ਸਵਾਜਾ ਤੁਰਤ ਤੁਰੈ ਤੇ ਉਤਰ ਸਲਾਮੈ ਤੀਨ ਕਰ ਹੋ ਲੀਜੈ ਆਪਣੋ ਤੁਰੈ ਲਇਓ ਮੈਂ ਮੋਲ ਭਾਰੇ ਦੋਹਰਾ ਮੋਹਰਾ ਘਰ ਪਹੁੰਚਾਇ ਕੈ ਤਿਨ ਕੋ ਚਰਿਤ ਦਿਖਾਏ ਆਨ ਤੁਰੋ nirbh ko dio hirdai har khup jae ith siri charitra bh khiane tria charitre bhum mantri sam bade 145 somo charitra samaapt mast sub mast apju dohra pramodh kuar rani rahe ja ko roop apaar vijay raj raja nirgh kiyo apna yaar ਹੁਣ ਤਾਸੋ ਜੋ ਬਚਨੁ ਚਾਰੇ ਪ੍ਰੀਤ ਕਰ ਹੋ ਸੁਣ ਰਾਜਾ ਮੁਰ ਬੈਨ ਲੀਜੀਓ ਹਿਰਦੈ ਤਰ ਜਬ ਕੀਓ ਸੋ ਅੰਬਰ ਪਿਤਾ ਬਣਾਏ ਕਰ ਹਉ ਲਖ ਕੈ ਤਉ ਰੋ ਰੂਪ ਰਹੀ ਉਰਜਾਏ ਕਰ ਅਵਰ راہ ਲੈ ਗਿਓ ਜੋ ਦਮ ਚਾਏ ਹੋ ਮੋਰ ਨਾ ਬਸ ਕਜ ਮਰੋ ਬਿਕਾਇ ਕੈ ਲਗਨ ਅਨੋਖੀ ਲਗੈ ਨਾ ਤੋਰੀ ਜਾਤ ਹੈ ਨਿਰਖ ਤਿਹਾਰੋ ਰੂਪ ਨਾਹੀ ਸਿਰਾਤ ਹੈ ਕੀਜੈ ਸੋ ਚਰਿਤ ਜੋ ਤੁਮ ਕਹਿ ਪਾਈਐ ਹੋ ਨਿਜ ਨਾਰੀ ਮੋਹਿ ਕੀਜੈ ਸੋ ਬਿਧ ਬਤਾਈਐ ਕੇ ਭਵਨ ਜੁਗਨ ਹੋਐ ਆਇ ਹੋ ਕਛੁ ਮਨੁਖ ਲੈ ਸੰਗ ਤਹਾਂ ਚਲ ਜਾਏ ਹੋ ਮਹਾਰਾਜ ਜੂ ਤੁਮ ਦਲ ਲੈ ਆਇਓ ਹੋ ਦੁਸ਼ਟਨ ਪ੍ਰਥਮ ਸੰਘਾਰ ਹਮੈ ਲੈ ਜਾਈਓ ਬਦਤਾਸ ਹੋ ਸੰਕੇਤ ਬੋਲ ਸੁਖ ਮੁਖ ਤੇ ਕਹਿ ਲੋਗਨ ਦਈ ਸੁਨਾਇ ਕੈ ਮਹਾਰੂਦਰ ਕੇ ਭਵਨ ਕਾਲ ਮੈਂ ਜਾਏ ਹੋ ਹੋ ਏਕ ਰਹਿ ਜਗ ਕੇ ਸਦਨ ਉਠਾਏ ਹੁਮ ਕਛ ਕੁਮ ਲੁਛ ਲੈ ਸੰਗ ਜਾਤ ਤਿਤ ਕਉ ਭਈ ਮਹਾਰੂਦਰ ਕੇ ਭਵਨ ਜਗਤ ਰਜਨੀ ਗਈ ਪਿਆਰੀ ਕੋ ਆਗਮ ਰਾਜੈ ਸੁਨ ਪਾਇਓ ਹੋ ਹੋਣ ਨਹਿ ਦਈ ਜੋਰ ਜੋ ਜੰਤਰੀ ਕੇ ਸੰਗ ਪ੍ਰਥਮ ਤਿਨ ਕਾਇਓ ਜੀਤ ਬਜੇ ਜੋ ਜੋਦਾ ਤਿਨੈ ਭਜਾਇਓ ਤਾ ਪਾਛੇ ਰਾਣੀ ਕੋ ਲੈਓ ਉਚਾਇ ਕੈ ਹੋ ਗ੍ਰਹਿ ਆਪਣੇ ਕੋ ਗਯੋ ਹਰਖੁ ਭਜਾਇ ਕੈ ਰਾਣੀ ਕੋ ਲੀਨੋ ਸੁਖ ਪਾਲ ਚੜਾਏ ਕੈ ਆਲਿੰਗਨ ਚੁੰਮਨ ਕੀਨੇ ਸੁਖ ਪਾਏ ਕੈ ਸੁਨਤ ਲੋਕ ਕੇ ਤ੍ਰਿਏ ਬਹੁ ਕੂਕ ਪੁਕਾਰ ਕੀ ਹੋ ਚਿਤ ਆਪਣੇ ਕੇ ਬੀਚ ਦਵਾਏ ਦੇਤ ਪੀ ਇਤ ਸਮੂਹ ਚਿਤਰ ਸਮਾਪਤ ਮਸਤ ਸੁਖ ਮਸਤੇ ਅਭਜੂ ਚੋ ਭਈ ਖੈਰੀ ਨਾਮ ਬਲੋਚਨ ਰਹਿ ਦੁਤੀਆ ਸਬਦ ਸੰਮੀ ਜਗ ਪਤਾ ਖਾਨ ਤਾ ਕੋ ਪਤਿ ਭਾਰੋ ਤਿਹੂ ਭਵਨ ਪੀਤਰ ਉਜਿਆਰੋ ਰੋਸ ਕਿਉ ਤਾ ਪੈ ਹਜਰ ਤੇ ਆਤੇ ਮੁਹਿਮ ਸੈਦ ਖਾਂ ਕਰੀ ਵਿਕਟ ਮਾਤੇ ਤਾਹੇ ਮਿਲਾਏ ਬਹਰ ਗੈਲੀਨੋ ਮੁਲਤਾਨ ਔਰ ਪਿਆਨੋ ਕੀਨੋ ਬੰਧਿਓ ਰਾਵ ਬਾਲਣ ਸੁਣ ਪਾਇਓ ਸਗਲ ਪੁਰਖ ਕੋ ਭੇਖ ਬਨਾਇਓ ਬਾਹ ਲੋਚੀ ਸੈਨਾ ਸਭ ਜੋਰੀ ਭਾਂਤ ਭਾਂਤ ਅਰਿ ਪ੍ਰਤਨਾ ਤੋਰੀ ਦੋਰਾ केर सैद खान कौत्रियन ऐसे कहयो सुनाए कह हमरो पद छोरीए कह लरिए संगाए अड़ेल सैद खान ऐसे वचनन सुन पाए कह चढ़यो जोर दल प्रवण सो कोप बढ़ाए कह है गए पैदल बहु बिदए सिंगार कह ओ सूर वीर बांकन को बाण प्रहार ਕਿਤੇ ਸੂਲ ਸੈਥੀਨ ਕੇ ਕਾਏ ਕਾਏ ਮਰੇ ਜੂਜ ਜਹਾਨ ਮਾਨੋ ਨ ਆਏ ਗਜੈ ਰਾਜ ਜੂਦੇ ਕਿਤੇ ਬਾਜ ਮਾਰੇ ਕਹੂੰ ਰਾਜ ਘੁੰਮੈ ਕਹੂੰ ਤਾਜ ਡਾਰੇ ਮੈਦਾਨ ਹੋਵੇ ਬਥੇ ਸਵਰਗ ਮੋ ਮਾਨੋ ਨ ਮੁਵੇ ਖੈਰੀ ਜਾਏ ਗਹਿ ਮਾਰੇ ਗਿਰਹਿ ਭੂਮ ਨ ਰਤੀਕ ਸੰਭਾਰੈ ਸਮੀ ਨਿਰਖ ਜਾਏ ਸਰ ਛੋਰਾ ਏ ਕੈ ਬਾਨ ਖੱਗ ਪਰੇ ਕਉ ਖੋਲ ਧਰੇ ਕਉ ਟੂ ਗਰੇ ਛਿਤਤਾ ਜਨਕੇ ਹਰ ਬਾਣ ਕਹੂ ਪਰ ਠੀਕਤ ਹੂ ਕਹੂ ਅੰਗ ਕਟੇ ਬਰਬਾਦ ਜਨਕੇ ਕਹੂ ਬੀਰ ਮਾਰ ਪਰ ਨ ਸੰਭਾਰ ਰਹੀ ਭਾਜ ਚਲੇ ਸੁਤ ਰਾਜਨਕੇ ਚਉਪਈ ਕੇਤੇ ਵਿਖ ਕਟ ਡਾਰੇ ਕੇਤੇ ਕਰੀ ਹਨੀਮਤ ਵਾਰੇ ਦਲ ਪੈਦਲ ਕੇਤੇ ਰਣ ਕਾਏ ਜੀਤ ਲੈ ਪ੍ਰਾਨ ਪਰਾਏ ਹੈਰੀ ਸੰਮੀ ਜਾਤ ਪਈ ਤਹਾਂ ਠਾਡੋ ਸੈਦ ਖਾਨ ਤੋਂ ਜਾ। ਨਿਜ ਹਥਿਆ ਜੰਜੀ ਰਹਿ ਚਾਰੀ ਤਰਵਾਰੈ। ਖੁਲਸ ਖਾਗ ਖੱਤਰੀਆ ਹੈ ਪ੍ਰਹਾਰਿਓ ਪ੍ਰਥਮ ਕਰੀ ਕਾਰ ਕੋ ਕਟ ਡਾਰਿਓ ਬੌਰ ਖਾਨ ਕੋ ਤੇਗ ਚਲਾਈ ਗਰੀਵਾ ਬਚੀ ਨਾਕ ਭਰਿਆਈ ਦੋਹਰਾ। ਅਟਕ ਨਾਕ ਮੈਂ ਆਸ ਰਹਿਓ ਗਹਿਓ ਹਾਥ ਸੇ ਛੂਟ ਪੂਜਾ ਅੰਬਾਰੀ ਸੋ ਬਜੀ ਰਹੀ ਬੰਗੂਰੀਏ ਟੂਟ ਚਉਪਈ। ਤਵ ਸਮੀ ਸੈ ਹਤੀ ਸੰਭਾਰੀ ਮਹਾ ਸੱਤਰ ਕੇ ਓਰ ਮੈਂ ਮਾਰੀ ਬਰਛਾ ਪਹਿ ਪਰੋਇ ਉਤਾਰਿਓ ਸਭਨ ਦਿਖਾਏ ਭੂਮ ਪਰ ਮਾਰਿਓ ਵੰਗ ਦਿਹਾਰ ਪਹਿਚਾਨੀ ਤੰਨੇ ਤੰਨੇ ਸੈਦ ਖਾਂ ਬਖਾਨੀ ਇਨਕੇ ਪੇਟ ਪੁੱਤਰ ਜੋ ਹੋਐ ਹੈ ਬਾਤਨ ਜੀਤ ਲੰਕ ਗੜ ਲੈ ਹੈ ਦੋਹਰਾ ਥੀਰ ਫੌਜ ਗਜ ਫਾਦ ਕੈ ਆਨ ਕੀਓ ਮੋਹਿ ਘਾਏ ਕੋ ਇਨਾਮ ਹੈ ਭਰਤਾ ਦੇਹੋ ਮਿਲਾਏ ਐਸ ਖੱਗ ਸਿਰ ਝਾਰ ਕੈ ਬੜੇ ਬਖਰੀ ਹੰਕਾਏ ਸੈਨ ਸਕਲ ਅਵਗਾਏ ਕੈ ਨਿਜ ਪਤੀ ਲੈਓ ਛਿਨਾਏ ਚੋਪਈ ਸੂਰ ਬੀਰ ਪਉਪਾਸ ਸੰਘਾਰੇ ਖੇਤ ਖੇਤ ਤੇ ਖਾਨ ਨਿਕਾਰੇ ਨਿਜ ਪਰਤਾ ਛਿਰਵਾਏ ਲਿਆਈ ਪਾਂਤ ਪਾਂਸੋਂ ਬੱਜੀ ਵਿਧਾਈ ਇਥੇ ਤ੍ਰਿਤਰੁਪਖਿਆਨੇ ਤ੍ਰਿਆ ਚਿਤਰੇ ਭੂਮੰਤਰੀ ਸੰਵਾਦੇ 147 ਸੋ ਚਿਤਰ ਸਮਾਪਤ ਮਸਤ ਸੁਮਸਤੇ ਅਪਜੁ જો ભઈ શહેર કનોજ કંચની રહે અધિક રૂપ તાકો જગ કહે દુર્ગદાત રાજા બસ ભયો રાનીને ડાર હૃદય તે દયો રાનીને બેઠ મંત્રીઓ કયો રાજા કર હમરે તે ગયો સો જતને આજ મિલ કરી જાય જાતે જા બેસવા કો મરિયે ઢિલ વિષણ સિંહ કો રાણી લયો બલાય ક કો કેલ તાસો કી પ્રીત ઉપજાય ક પુન તાસો યો બહેન કહે ਉਮੋਰ ਕਾਰਜਹਿ ਕਰੋ ਹਿਤੂ ਮੋਹ ਜਾਨ ਕੈ ਪ੍ਰਥਮ ਬਹੁ ਤਨ ਯਾ ਬੇਸਵਾ ਕੋ ਦੀ ਜਿਆ ਬਹੁ ਰਾਵ ਦੇਖਤ ਹਿਤ ਯਾ ਸੋ ਕੀ ਜਿਆ ਜਬ ਰਾਜਾ ਸੋ ਯਾ ਕੋ ਨਹਿ ਤੁਰਾਈਐ ਹੋ ਬਹੁ ਧਾਮ ਬੋਲ ਏ ਕਾਈਐ ਪ੍ਰਥਮ ਦਰਬ ਬੇਸਵਾ ਕਹਦੇ ਹੋ ਮਨਾਇ ਕੈ ਪੁੰਤਾ ਸੋ ਰਤਮਾਨੀ ਪ੍ਰੀਤੁ ਕੈ ਜਬ ਤਾ ਕੋ ਨਿਰਪਲੀਨੋ ਸਦਨ ਬੁਲਾਇ ਕੈ ਹੋ ਤੌਣ ਸਵਾਵੇਂ ਬੈਠਿਓ ਸੁ ਆਏ ਕੈ भीषण सिंह ते कहो कछु मुस्काय कै बहु सार तए करी निरत है दिखराए कै या मूर्ख निरप को नह देसी दी दीए ओ यासो नयो बढाए न या को की दीए चौपाई तब रानी निरप पै चल ਤਾਤੇ ਤੁਮਰੋ ਯਾਪੈ ਹਿਤ ਕੀਨੋ ਕਿਹ ਕਾਜੇ ਬੇਸਵਾ ਤੁਮ ਕੋ ਭਾਵੀ ਤਿਆਗ ਕਰਿਓ ਤਹਿ ਮੋਹੇ ਔਰ ਪੁਰਖਤਾ ਕੋ ਰੁਚੈ ਲਾਜ ਨਾ ਲਾਗ ਤੋਹੇ ਚਉਪਈ ਜੋ ਇਰਕੇ ਰਾਖੇ ਗ੍ਰਹਿ ਲਈਐ ਟਟੂਐ ਚੜ ਜੀਤਾ ਸੰਗਰਾਮ ਕੋ ਤਾਜੀ ਪੈ ਦਾਮ ਇਨ ਬੇਸਵਨ ਕੋ ਲਾਜ ਨੈ ਨਹ ਜਾਣ ਤਰਾ ਰਾਵ ਛੋਰ ਰੰਕ ਕਹਿ ਭਜੈ ਪੈ ਸੰਕੀ ਪ੍ਰਤੀਤ ਡਿਲ ਤੂੰ ਛੇਤੀ ਬਾਹਰ ਕੋ ਨਿਹ ਜਿਤਾਵੀਂ ਨਿਜ ਹਿਤ ਵਾਕੇ ਸੰਗ ਟਕਾ ਜੋ ਲਿਆਵੀਂ ਔਰ ਸਦਨ ਮੋ ਜਾਜੋ ਯਹ ਬਤਾਈਐ ਹੋ ਤਵ ਰਾਜਾ ਜੋ ਇਹ ਕਹ ਲੀਕ ਲਗਾਈਐ ਦੋਹਰਾ ਏਤ ਰਾਣੀ ਰਾਜਾ ਪੈ ਐਸ ਕਹੋ ਸਮਝਾਏ ਮਨੁ ਛਪਠੈ ਉਤਜਾਰ ਕੋ ਬੇਸਵਾ ਲਈ ਬੁਲਾਏ ਚਉਪਈ ਜਬ ਬੇਸਵਾ ਤਾਂ ਕੇ ਕਰ ਗਈ ਰਣੀ ਹੈ ਆਨ ਸਖੀ ਸੁਦਦਈ निर्पद तो लै च्रित चित दिखायो निरपुत्रिग चित मैं जा कहो धन करी अपनी यार तिन पैसन हित त्याग मुहे अरत कियो प्यार अड़िल बेस्वाबा हरयाई केल कमाय कै राव लरकबा दए बहुत चिमटाए कै कील करत मर गई तमन दुख पायो हो कैस फेस नी रानी चित बनायो ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਮੰਤਰੀ ਸੰਬਾਦੇ 148 ਸਮੂਹ ਚਿਤਤਰ ਸਮਾਪਤ ਮਸਤ ਸੋਗ ਮਸਤੇ ਅਪਜੂ ਚੌਪਈ ਪਰਪਤ ਸਿੰਘ ਪੋਸਤੀ ਰਹਿ ਪਾਂਜ ਇਸਤਰੀ ਜਾਕੇ ਜਗ ਕਹੈ ਪੋਸਤ ਪੀਤ ਕਭੂ ਨਾ ਘਾਵੈ ਤਾ ਕਉ ਕਮਨ ਮੋਲ ਲੈ ਪਿਆਵੈ ਇੱਕ ਦਿਨ ਟੂਟ ਅਮਲ ਤਹਿ ਗਇਓ ਅਦਕ ਦੁਖੀ ਤਬ ਹੀ ਸੋ ਭਇਓ ਤਬ ਪਾਂਜੋ ਇਸਤਰੀਆਂ ਸੁਣ ਪਇਓ ਖੋਜ ਰਹੀ ਗ੍ਰਹਿ ਕਾਛੁ ਨਾ ਲਹਿਓ ਤਾ ਪਾਂਚੋ ਮਿਲਵਤੋ ਵਿਚਾਰਿਓ ਉਪਰਖਾੜ ਦੁਖਸੋ ਡਾਰਿਓ ਇਨ ਗਾਰਡਨ ਲੈ ਚਲੈ ਉਚਾਰਿਓ ਨਿਜਮਣ ਯਹ ਤ੍ਰਿਆਨ ਵਿਚਾਰਿਓ ਦਿਲ ਡੰਡਕਾਰ ਕੇ ਬੀਜ ਬੈ ਤ੍ਰਿ ਵੈ ਗਈ ਮਾਰਗ ਮੈਂ ਗਢਾ ਗਹਿਰੋ ਨਿਰਖਤ ਭਈ ਆਪਤ ਲਖੈ ਬਟੂਆ ਧਨ ਲੀਨੇ ਕਨੋ ਹੋ ਕਯੋ ਹਮਾਰੋ ਸੌਦੋ ਅਬ ਆਛੋ ਬਨੋ ਸੁਨੋ ਵੀਰ ਬਟਾਉ ਬਾਤ ਬਲੋਚ ਸਭ ਕੀ ਇਹ ਕੇ ਹੇਤਾਂ ਆਈ ਹੰ ਸਭ ਯਾ ਸੋ ਆਣ ਜੋ ਅਵੈ ਸੁਹਾਰੀਐ ਹੋ ਹਮਰੇ ਗੁਣ ਅਉ ਗੁਨ ਨਾ ਹਿਰਦੈ ਵਿਚਾਰੀਐ ਉਸਟਨ ਦੇ ਸਭ ਉੱਤਰ ਬਲੋਚ ਤਾ ਗਏ ਨੀਤ ਖੈਰ ਕੀ ਫਾਤੀਆ ਦੇਖ ਵਹਾਂ ਭੈ ਤਾਕੋ ਸੁਮਾਰ ਮ੍ਰਿਤਕ ਕੀ ਜਿਉ ਨਿਰਖ ਹੋ ਨਿਕਟੇ ਸਥਿਤੈ ਭੈ ਗੜਾ ਕੋ ਗੋਰ ਲਿਨੀ ਘਾਟ ਉਠਾਇ ਮ੍ਰਿਤਕ ਤੇਹ ਜਾਣ ਕੈ ਸਕਿਓ ਨਾ ਭੇਦ ਅਭੇਦ ਕਛੂ ਪੈਚਾਨ ਕੈ ਜਬ ਤਾ ਪੈ ਸਭ ਹੀ ਇਸਥਿਤ ਭੇ ਕੈ ਹੋ ਡਾਰ ਫਾਂਸੀਆਂ ਗਢੇ ਦਏ ਗਿਰਾਇ ਕੈ ਤੇ ਦੌਰ ਆਫੂ ਲਿਆਵਤ ਪਈ ਏਕ ਪੁਕਾਰ ਉੱਚ ਚਲੀ ਕੋਸਕ ਗਈ ਬਹੁ ਲੋਗਨ ਕੋ ਲਿਆਇ ਸੋਨ ਕੋ ਹੋ ਕਹਿ ਭਾਸਨ ਪਤੀ ਹਨੇ पांची स्त्री तिन जते आई धनवंती अठ ठगन तकाई पंचन के फांसी गै हम पांचो रह गई बिचारी दोरा फाति मारे फासन ठगन साथी रहयो ना कोई हम वन में एकल त्रिया दैब कहा गति होए चौपाई काजी कोतवार तह आए रण सिंह गे रण नाद बजाए हम साथी ए तिहारे दोरा चार ऊंट मोहरन परे आठ रुपियन साथ पत मुवे एऊ गए तौ हम पै अनाथ चौपी तब काजिये पांत चारो त्रिया कछु जिन शोक विचारो हमको को फार खती लिखदी जय दुआ दस अपने ली जय दोरा दीनन की रक्षा करी कौडी गनी को पाए दयो बहोत तन तन काजिन के राय दुष्ट रिष्ठ निवार कै लीनो पता बचाए पांत पांत सेवा करी ये हरख उपजाए ए श्री चरित्रो बखियाने त्रया चरित्रे पू मंत्री संबादे चरित्र समाप्त मस्त मस्त अपजू